दस्त ختمے ਕਰੇ ਹੋਏ ਨੇ ਸਮਿਆਂ ਦੇ ਕੋਰੇ ਕਾਗਜ਼ ਤੇ ਮੇਰਾ اقرار نامہ ਵੀ ਦਰਜ ਹੈ ਪਰ ਕਿਸੇ ਪਿਓ ਦੇ ਪੁੱਤ ਨਾਲ ਦੀ ਜਾਂ ਕਿਸੇ ਚਗਲ ਜਾਂ ਸ਼ਲਾਰੂ ਨਾਲ ਦੀ ਮੇਰਾ اقرار ਉਸ ਪਰਮ ਆਤਮਾ ਨਾਲ ਹੈ ਜਿਸ ਅਸੀਂ ਸਾਰੇ ਪਰਮਾਤਮਾ ਕਹਿੰਦੇ ਹਾਂ ਸੂਆਮ ਤੇ ਖਾਸ ਨੂੰ ਅੱਜ ਐਲਾਨਾਂ ਕਿ ਸ਼ੁਭਦੀਪ ਸਿੰਘ ਸੱਧੂ ਯਾਨੀ ਕਿ ਸੱਧੂ ਮੂਸੇ ਨਾ ਕਿਸੇ ਨਾਲ ਬੱਜਿਆ ਸੀ ਤੇ ਨਾ ਹੀ ਕਿਸੇ ਨਾਲ ਵੱਜਿਆ ਹੈ ਸਿੱਧੂ ਸਿੱਧਾ ਪਰ ਸਿੱਧੂ ਖੁੱਲਾ ਸਾਨ ਵੀ ਹੈ ਸਿੱਧੂ ਵੱਜੂ ਤਸਦਾ ਹੱਕ ਵਿੱਚ ਵੱਜੂ ਸੋ ਮੇਰੀ ਜਾਨ ਕਾਲ ਰੱਖਿਓ ਤੇ ਬਾਕੀ ਅਤਾ ਪਤਾ ਦੱਸ ਕੇ ਆਇਓ ਕਲਮ ਤੇ ਉਂਗਲਾਂ ਦੀ ਪਕੜ ਵੀ ਪੂਰੀ ਹੈ ਬੰਦੂਖ ਦੇ ਘੋੜੇ ਤੇ ਵੀ ਪਕੜ ਪਰਮਾਤਮਾ ਨੇ ਓਨੀ ਹੀ ਬਖਸ਼ੀ ਹੈ ਚੋਂਹੋਂ ਪਾਸਿਓਂ ਭਲੇਖੇ ਕਰ ਦਿਆਂਗੇ ਕਾਲ ਦੀ ਕਲਮ ਵਰਤਮਾਨ ਦੀ ਸਿਆਹੀ ਤੇ ਆਉਂਦੇ ਭਵਿੱਖ ਦੀ ਮੇਰੇ ادب ਦੀ ਚੜ੍ਹਦੀ ਕਲਾ ਮੇਰੇ ਉਸ ਪਰਮਾਤਮਾ ਦੀ ਨਜ਼ਰ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਹੈ ਤੇ ਮੇਰੇ ਉਸੇ ਵਾਹਿਗੁਰੂ ਦੀ ਦਾਤ ਹਮ ਸਾਈਂਡ ਟੂ ਗੋਡ